ਸੰਤ ਜਨਾ ਦਾ ਦੇਖਣ ਸਭ ਬ੍ਰਹਮ ਸੰਤ ਜਨਾ ਕੇ ਹਿਰਦੇ ਸਭ ਤਾਂ ਸੰਤ ਜਨਾ ਕੇ ਸਭ ਫਤ ਜਾਨਦੇ ਜਿਹੜੇ ਜਾਣਦੇ ਨੇ ਸੰਤ ਕਿਵੇਂ ਬਣੀਦਾ ਕਹੇ ਜਾਂਦਾ ਸੰਤ ਸ਼ਾਂਤੀ ਬਾਰੇ ਜਿਹਨਾਂ ਦੀ ਜਾਣਕਾਰੀ ਹੈ ਇਹ ਸ਼ਾਂਤੀ ਐਮਰਦੀਓ ਸੰਤ ਹੈ ਜਿਹਨੂੰ ਸ਼ਾਂਤੀ ਮਿਲ ਗਈ ਪੱਛੇ ਵੀ ਉਹਦੀ ਸ਼ਾਂਤੀ ਦੀ ਜਾਣਕਾਰੀ ਵੀ ਹੈ ਉਹ ਸੰਤ ਜਨ ਉਹਦਾ ਪੇਖਣ ਦੀ ਹੁੰਦਾ ਦੇਖਣਾ ਦਾ ਮਤਲਬ ਦੇਖਣਾ ਨਹੀਂ ਹੁੰਦਾ ਉਹਨੇ ਸਮਝ ਕੀ ਸਮਝ ਗਈ ਹੈ ਉਹਨਾਂ ਦੀ ਦੇਸ਼ੀ ਕੋਣ ਕੀ ਹੈ ਦੇਖਣ ਸਭ ਪ੍ਰਭੂ ਉਹ ਸਾਰਿਆਂ ਦੇ ਅੰਦਰ ਬ੍ਰਹਮ ਬਰਾਬਰ ਦੇਖਦੇ ਨੇ ਉਹ ਚਾਰ ਵਰਣ ਦੀ ਬੋਲ ਚਾਰ ਵਰਣਾਂ ਨੂੰ ਬੋਲ ਉਹ ਇਹ ਦੇਖਦੇ ਨੇ ਸਾਰਿਆਂ ਦੇ ਅੰਦਰ ਪ੍ਰਭੂ ਇੱਕੋ ਜਿਹਾ ਉਹਨਾਂ ਨੂੰ ਬਾਹਲਾ ਸਰੀਰ ਦਾ ਮਤਲਬ ਨਹੀਂ। ਜਾਨਾ ਜੋਤ ਆਪੂਛ ਹੋ ਜਾਂਦੀ। ਜਾਂ ਤਾਂ ਹੀ ਸਰੀਰ ਤੇ ਉਹਨਾਂ ਦਾ ਕੋਈ ਮਸਲਬੇ ਨਹੀਂ ਹੁੰਦਾ। ਉਹ ਅੱਖਾਂ ਤੇ ਵਿਸ਼ਵਾਸ ਨਹੀਂ ਕਰਦੇ। ਅੱਖਾਂ ਨਾਲ ਦੇਖਣ ਨੂੰ ਦੇਖਣ ਨੂੰ ਨਹੀਂ ਉਹਨਾਂ ਦਾ ਜੋਤ ਨਾ ਸਮਝਦਾ ਉਹ ਦੇਖਦੇ ਨੇ ਦੇਖਦੇ ਹੁੰਦੇ ਨਹੀਂ। ਸੰਤ ਜਨਾਂ ਦਾ ਦੇਖਣਾ ਬ੍ਰਹਮ ਬ੍ਰਹਮ। ਉਹਨਾਂ ਨੇ ਸਭ ਦੇ ਅੰਦਰ ਬ੍ਰਹਮ ਦੇਖਣਾ ਹੁੰਦਾ ਬ੍ਰਹਮ ਕਿੰਨਾ ਮਲੀ ਇਹ ਨਾ ਦਾ ਕਿੰਨਾ ਇਹ ਦਾ ਬ੍ਰਹਮ ਠੀਕ ਹੈ ਬਰੀਜ ਜਿਹੜਾ ਹੈ ਬ੍ਰਹਮ ਬਰੀਜ ਬ੍ਰਹਮ ਇਹ ਸਰੀਰ ਕਰਕੇ ਮਰੀਜ਼ ਨਹੀਂ ਆਇਆ ਸਰੀਰ ਕਰਕੇ ਮਰੀਜ਼ ਬੀਜੋ ਹਸਪਤਾਲ ਹੋ ਰਹੇ ਨੇ ਇਹਨਾਂ ਦਾ ਆਇਆ ਬ੍ਰਹਮਾ ਉਹ ਬਰੀਜ ਹੈ ਸਭ ਦਾ ਬ੍ਰਹਮ ਇਹ ਬਰੀਜ ਆਇਆ ਹੋਇਆ ਬ੍ਰਹਮ ਦਾ ਇਲਾਜ ਹੋ ਰਿਹਾ ਸਤ ਜੀ ਨਾਮ ਦਾ ਪੇਖਣ ਸਭ ਬ੍ਰਹਮ ਸਤ ਜਨ ਜਣ ਸੱਜ ਖਾਂ ਚ ਬੈਠੇ ਨੇ ਬ੍ਰਹਮ ਦੇਖਦੇ ਬ੍ਰਹਮ ਦੇਖਦੇ ਨੇ ਇਹਦੇ ਟੀਕਾ ਲਾਉਣਾ ਉਹਨਾਂ ਨੇ ਇਹਦਾ ਇਲਾਜ ਕਰ ਰਹੇ ਨੇ ਉਹ ਸਰੀਰ ਦਾ ਇਲਾਜ ਨਹੀਂ ਕਰ ਰਹੇ ਆਤਮਾ ਦਾ ਇਲਾਜ ਕਰ ਰਹੇ ਨੇ ਉਹਨਾਂ ਦੇ ਉਪਚਾਰ ਹਿੱਟ ਬ੍ਰਹਮ ਆਗੇ ਬਹਾਲਾ ਸ਼ੀਰ ਹੈ ਬਹਾਲੇ ਸ਼ੀਰ ਨੂੰ ਬੜਬੜੋਗੇ ਅਸਲ ਹੋ ਡਾਕਟਰ ਹੈਗੇ ਨਹੀਂ ਜਿਹੜਾ ਮੇਰਾ ਬਾਦਗੁਰੂ ਕੋ ਬੰਦਾ ਹੈ ਬਹਾਲੇ ਸ਼ੀਰ ਦਾ ਬਾਦ ਨਹੀਂ ਆਉਂਦਾ ਇਹਦੇ ਦਾ ਬੈਠੇ ਕੋਈ ਵਾਹ ਲੈ ਜੇ ਨੂੰ ਬਣ ਲਵੇ ਵਿਚਾਰ ਬੜੋ ਕੋਕ ਦੇ ਨਾਲ ਬੈਰੂ ਬੈਰੂ ਕਰਕੇ ਪਾਣੀ ਪਲਾਈ ਜਾਓ ਆਪੇ ਬੱਜੂਆ ਹੈ ਕੈਂਸਰ ਵਾਲਾ ਬਰਵਾਦਾ ਨੇ ਜੋ ਸਾਰੇ ਹਾਂ ਇਹ ਸਾਰੇ ਲੋਕ ਕੌਂਕ ਨਾਮ ਹੈ ਬੈਰੂ ਬੈਰੂ ਕਰੀ ਜਾਓ ਕਰੀ ਜਾਓ ਦੁਆ ਉੱਠ ਖੜੇ ਪਾਣੀ ਦੇ ਵਿੱਚ ਬੈਰੂ ਬੈਰੂ ਦਾ ਸ਼ਬਦ ਜਿਹੜਾ ਹੈਗਾ ਉਹਦੀ ਸ਼ਕਤੀ ਹੋ ਸਭ ਨੂੰ ਕੋਈ ਪਾਣੀ ਪਲਾਈ ਜਾਓ ਕੋਈ ਲੋੜ ਨਹੀਂ ਹਸਦਾ ਕਿਹੜੀ ਗੱਲ ਨਾ ਹਾਂ ਇਦਾਂ ਨਹੀਂ ਹਾਂ ਪਾਲੇ ਜੀ ਦਾ ਕੋਈ ਮਹਰੂਲੀ ਉਹ ਅਲੱਗ ਹੈ ਵਾਹਿਗੁਰੂ ਸੰਤ ਜਨਮ ਦਾ ਪ੍ਰਖਮ ਸਭ ਬ੍ਰਹਮ ਨੂੰ ਉਹਨਾਂ ਦੇ ਪ੍ਰਖ ਅਲਾਈ ਥੱਲੇ ਜਿਹੜੇ ਸੰਤ ਜਨ ਉਹਨਾਂ ਦਾ ਦ੍ਰਿਸ਼ਟੀ ਬ੍ਰਹਮ ਨੂੰ ਸਮਝਉਣਾ ਗਿਆਨ ਦੇਣਾ ਇਹ ਬ੍ਰਹਮ ਦਾ ਭਰਮ ਦੂਰ ਕਰਨਾ ਪਰਮ ਤੂਰੋ ਤਾਂ ਭੈ ਦੂਰ ਹੋਊ ਗੁਰ ਪ੍ਰਸਾਦ ਕਾ ਨਾਸ ਫਿਰ ਭਰਮ ਗਿਆ ਭਉ ਭਾਗਾ ਉਈ ਜਿਹੜੀਆਂ ਪੈਦਾ ਬਿਮਾਰੀਆਂ ਪੈਦਾ ਡਿਪਰੈਸ਼ਨ ਵਗੈਰਾ ਤਾਂ ਹਟਣਗੀਆਂ ਉਹ ਜੋ ਡਿਪਰੈਸ਼ਨ ਵਗੈਰਾ ਪੈਦਾ ਹੁੰਦਾ ਤਾਂ ਹਟਣਗੀਆਂ ਉਹ ਬਿਮਾਰੀਆਂ ਉਹਨਾਂ ਤੋਂ ਫਿਰ ਸਰੀਰਕ ਬਿਮਾਰੀਆਂ ਪੈਦਾ ਹੋ ਜਾਂਦੀਆਂ ਉਹ ਗੱਲ ਠੀਕ ਹੈ ਉਹ ਫਿਰ ਜੇ ਪਹਿਲਾਂ ਪੈਦਾ ਹੀ ਨਾ ਹੋਣ ਲੋਬੋਤਾ ਤਾਂ ਠੀਕ ਹੈ ਪਰ ਪੈਦਾ ਹੋਈ ਹੋਈ ਹਟਣੀ ਮੁਸ਼ਕਲ ਸੰਤ ਜਿਨਾ ਕੇ ਪੇਖਰ ਸਾਹਿਬ ਸੰਤ ਜਿਨਾ ਕੇ ਹਿਰਦੇ ਸੋਪ ਤਾਂ ਕਿ ਸਤ ਜਨਾ ਕੇ ਹਿਰਦੇ ਸੋਪ ਸਭ ਧਰਬ ਜਿੱਦਾਂ ਦੁਨੀਆਂ ਦੇ ਧਰਮ ਨੇ ਸਾਰਿਆਂ ਦੀ ਸਮਝ ਉੱਦੀ ਹੋਵੇ। ਇਹ ਕਰਕੇ ਸਾਰਿਆਂ ਦੇ ਵਿੱਚ ਕੋਰੈਕਸ਼ਨ ਕਰੀ ਜਾਂਦੇ ਨੇ। ਸਾਰੇ ਧਰਮਾਂ 'ਚ ਕਬੀ ਕੀ ਉਹ ਕੋਰੈਕਸ਼ਨ ਕੀਤੀ ਹੋਈ ਹੈ ਗੁਰਬਾਣੀ 'ਚ। ਸਾਰੇ ਧਰਮਾਂ ਦੀ ਉਹਨਾਂ ਨੂੰ ਜਾਣਕਾਰੀ ਸਮਝ ਉੱਦੀ ਹੈ ਵੀ ਇਹ ਧਰਮ ਦੀ ਇੱਥੋਂ ਕਬੀ ਹੈ। ਇਹ ਧਰਮ ਵਾਲੇ ਇੱਥੋਂਾ ਭੁੱਲ ਗਏ। ਇਹ ਧਰਮ ਵਾਲੇ ਇੱਥੋਂ ਭੁੱਲ ਗਏ। ਉਹ ਨੇੜੇ ਦੀ ਸੋਚ ਹੈ ਨਾ ਉਹਨਾਂ ਦੀ। ਇਹ ਤੁਰਕੀ ਸੋਚ ਹੈ ਉਹ ਨੇੜੇ ਦੀ ਸੋਚ ਹੈ। ਜੇ ਥੋੜਾ ਭੁੱਲ ਗਏ ਉਹਨੂੰ ਬਤਾਉਂਦੇ ਵੀ ਥੋੜਾ ਹੀ ਦੂਰ ਲੱਗੇ ਗੱਢ ਕੇ। ਹਾਂ ਜੀ ਸੰਤ ਜਨਾਂ ਸੁਣੇ ਸੁਭਾਜਨ ਸੰਤ ਜਨ ਸੁਣੇ ਸੁਣਨ ਕੋਈ ਅੰਤ ਨਹੀਂ ਹੁੰਦਾ ਉਹ ਸੁਭਾਜਨ ਸੁਣਦੇ ਨੇ ਸੋਹਣੇ ਜੇ ਲੱਗਦਾ ਸੁਣਦੇ ਹਨ ਸੰਤ ਜਨ ਸੁਭਾਜਨ ਸੁਣਦੇ ਨੇ ਦੁਆ ਸੁਭ ਤੋਂ ਬਿਨਾ ਕੋਈ ਵਜਨ ਦੀ ਸੁਣ ਨਹੀਂ ਕੋਈ ਜਿਹੜੋ ਨਹੀਂ ਸੁਭ ਤੋਂ ਬਿਨਾ ਸ਼ੋਭੇ ਹੁੰਦਾ ਉਹ ਸ਼ੁਭਤਾ 네ਗੇਟਿਵ ਹੈ ਵਿਚਾਰ ਲੈ ਵੀ ਬਚਨ ਹੈ ਰਜੋਗੁਣ ਵਾਲੇ ਬਚਨ ਵੀ ਤੇ ਤਮੋਗੁਣ ਵਾਲੇ ਨਹੀਂ ਸੁਣਦੇ ਰਜੋਗੁਣ ਵਾਲੇ ਵੀ ਨਹੀਂ ਸੁਣਦੇ ਸ਼ੁਭ ਬਚਨ ਸੁਣਦੇ ਸ਼ੁਭ ਬਚਨ ਗੁਰਬਾਣੀ ਤੋਂ ਥੱਲੇ ਸਭ ਬਚਨ ਜਿਹੜੇ ਸ਼ੁਭ ਨੇ ਕੇਵਲ ਗੁਰਬਾਣੀ ਦੀ ਜਿਹੜੀ ਸਹੀ ਵਿਆਖਾ ਇਹੀ ਸ਼ੁਭ ਬਚਨ ਗੁਰਬਾਣੀ ਹੀ ਸ਼ੁਭ ਬਚਨ ਇਹ ਤਾਂ ਘੱਟ ਕੋਈ ਚੀਜ਼ ਸੁਣਦੇ ਹੀ ਨਹੀਂ ਰਕਾ ਗੁਰਕੇ ਬਚਨ ਪਛਾਣਾ ਦੂਜੀ ਬਾਤ ਮੈਂ ਚਾਹੀਦਾ ਬਦੂਈ ਗੱਲ ਸਮਝਈ ਦੀ ਦੂਈ ਗੱਲ ਤੇ ਕੰਧ ਧਰਦੇ ਹੀ ਨਹੀਂ ਸੰਤ ਜਨ ਸੁਭ ਬਚਨ ਸੁਣਦੇ ਨੇ ਦੂਈ ਗੱਲ ਕਰਨੇ ਨਹੀਂ ਦਿੰਦੇ ਸਰਬ ਵਿਆਪੀ RAM ਸੰਗ ਰਚਨ ਸਰਬ ਵਿਆਪੀ RAM ਜਿਹੜਾ ਸਰਬ ਵਿਆਪੀ ਉਧੇ ਨਾਲ ਰਹੇ ਰਹਿੰਦੇ ਸੁਭਾਚਨ ਉਧੇ ਨਾਲ ਜਾਉਂਦੇ ਜਦੋਂ ਵੀ ਮਾਇਆ ਦੀ ਗੱਲ ਕਰੋਗੇ ਤੁਸੀਂ ਉੱਥੇ ਟੁੱਟ ਜਾਓਗੇ ਪੁਰ ਤੁਸੀਂ ਜਾਂਦੇ ਦੇਖ ਲੋਤੇ ਉੱਪਰ ਤੋਂ ਇਹ ਗੱਲ ਇਹ ਨਹੀਂ ਸਰ ਕਿਸੇ ਦਫਤਰ ਚਲੇ ਜਾਓ ਦਰਵਾਹ ਕਿਤੇ ਚਲੇ ਜਾਓ ਪ੍ਰਕਰਮਾਂ ਚਲੇ ਜਾਓ ਇਹ ਗੱਲ ਹੈ ਉਹ ਜੇ ਉੱਥੇ ਜੀ ਇਹ ਗੱਲ ਫਿਰ ਹੋਊ ਕਿੱਥੇ ਹੋਰ ਕਿੱਥੇ ਹੋੜ ਬਾਰਡਰ ਤੇ ਇਹ ਗੱਲ ਹੈ ਜੀ ਹੋਰ ਕਿੱਥੇ ਹੋਊਗੀ ਕਦੇ ਨਹੀਂ ਹੋਣੀ ਦਫ਼ਤਰਾਂ ਜਾ ਕੇ ਦੇਖ ਲੋ ਕੀ ਗੱਲ ਇਹਦੇ ਦਾ ਖਿਲਾਫ ਨੇ ਉਹ ਸਾਰੀ ਇਹ ਤਾਂ ਗੱਲ ਕਲ ਦਿੰਦੇ ਜਦੋਂ ਲੇਖ ਲਿਖਣ ਲੱਗੇ ਤਾਂ ਇਹਦੇ ਦਾ ਖਿਲਾਫ ਸੀ ਉਹਦਾ ਲੇਖਾ ਤੋਂ ਮਾਚ ਕੇ ਵੀ ਇਹ ਲੈ ਕੇ ਆਉਂਦੇ ਸ ਗੁਰਬਾਣੀ ਨੂੰ ਨੇ ਉਹ ਤਾਂ ਸਾਰਾ ਸਿਸਟਮ ਹੈ ਖਿਲਾਫ ਹੈ ਉੱਥੇ ਖੜਾ ਸਟਰਕਚਰ ਦੇ ਖਿਲਾਫ ਖੜਾ ਹੈ ਬੀੜਿਆ ਦੇ ਬੀੜੇ ਦੇ ਖੜਾ ਸਾਰਾ ਸੱਕਤ ਇਹਨੂੰ ਰੋਕਣ ਦਾ ਸੀ ਅਤੇ ਆਰਐਸਐਸ ਦੁਹਰਾਇਆ ਸਭ ਹੁਣ ਜਾਣਦੇ ਨੇ ਕਿਉਂਕਿ ਉਹ ਕਾਲੇ ਵਾਸਤੇ ਆਰਥਿਕ ਸੱਜਣੇ ਉੱਥੇ ਹੈ ਬੀਜੇਪੀ ਦੇ ਬਤੇ ਕਾਦੇ ਵਾਸਤੇ ਨੇ ਘਰਵਾਂ ਦਾ ਪ੍ਰਚਾਰ ਕਰਵਾਸਤੇ ਨੇ ਅਭੂਤੀ ਕੋਈ ਵਾਸਤੇ ਪਤਾ ਤਾਂ ਹੈ ਵੀ ਤਖਤ ਦੇ ਨੇ ਰੌੜਾ ਹੀ ਪਿਆ ਹੈ ਕਾਦੇ ਵਾਸਤੇ ਨੇ ਕਿਹੜੀ ਗੱਲ ਦੀ ਇਹਨਾਂ ਦੀ ਆਪਸ ਵਿੱਚ ਝਾਂਗ ਹੈ ਠੀਕ ਹੈ ਬਾਲੇ ਰਾਜ ਦੀ ਵੀ ਹੈ ਆ ਵੀ ਇਹਦਾ ਸਾਚਾ ਮੋਰਚਾ ਬੀਜੇਪੀ ਦਾ ਰਖਾ ਲਿਆ ਦਾ ਸਾਜਾ ਮੋਰਚਾ ਸੱਚ ਸੱਚ ਦੋਹਾਂ ਨੂੰ ਖਤਰਾ ਹੈ ਅਕਾਲੀ ਦੋਹਾਂ ਨੂੰ ਖਤਰਾ ਦੋਹੇ ਤਰਫੋਂ ਖਤਰਾ ਹੈ ਇਹ ਨਾ ਦੁਸ਼ਮਣ ਹੈ ਸੱਚ ਪਕਾਲੀਆਂ ਦਾ ਬੀਜੇਪੀ ਦਾ ਇਹਦੇ ਖਿਲਾਫ ਦੋਏ ਇਕੱਠੇ ਹੀ ਰਹਿਣਗੇ ਸਿਆਸੀ ਤੌਰ ਤੇ ਅਡਲ ਹੋ ਸਕਦੇ ਨੇ ਇਸ ਮੋਰਚੇ ਤੇ ਅੱਤ ਨਹੀਂ ਹੋਣਗੇ ਅਕਾਲੀ ਬੀਜੇਪੀ ਤੋਂ ਇਹ ਕਹਿਣਾ ਤਾਂ ਸੱਚ ਹੈ ਸੱਚ ਦੋਹਾਂ ਨੂੰ ਖਤਰਾ ਪੈਦਾ ਕਰਦਾ ਕੁਰਾਨੇ ਰਾਜ ਕਰਨਾ ਇਹ ਗੱਲ ਬੇਲਾ ਨਹੀਂ ਇਹ ਸਾਂਝਾ ਦੁਸ਼ਮਣਾਂ ਸਾੱਚੇ ਤੋਂ ਹੁੰਦਾ ਹੈ ਕਾਂਗਰਸ ਸਾभी ਪਰ ਉਹ ਧਰਮ ਦੀ ਗੱਲ ਹੀ ਕਰਦੇ कुरਾਨੇ ਹਟਕੜੇ ਕਰਦੇ ਤੁਹਾਨੂੰ ਤੋਂ ਵੀ ਬਾਰੇ ਸਾਡੇ ਵਾਸਤੇ ਗੱਲ ਨਹੀਂ ਇਹ ਧਰਮ ਦੇ ਠੇਕੇਦਾਰ ਨੇ ਤਾਂ ਖਤਰਾ ਹੈ ਹੁਣ ਹੋਰ ਕਿਸੇ ਪਾਰਟੀ ਨੂੰ ਧਰਮ ਦਾ ਖਤਰਾ ਨਹੀਂ ਬਾਕੀ ਪਾਰਟੀਆਂ ਨੂੰ ਖਤਰਾ ਨਹੀਂ ਇਹਨਾਂ ਨੂੰ ਖਤਰਾ ਕਿ ठेकेदारी ਇਹਨਾਂ ਕੋਲ ਹੈ ਧਰਪੀ। ਇਹੀ ਧਰਪ ਦੇ ਖਿਲਾਫ ਨੇ ਬਾਕੀਆਂ ਨੂੰ ਸਾਰਿਆਂ ਨਾਲ। ਇਹ ਇਹਨੂੰ ਬਰੋਗਣ ਵਾਈ ਹੋਈਆ ਆ ਜਾਣੀਏ ਦਿਨ ਪਰ ਦਿਨ ਆਈ ਹੋ ਜਾਂਦੀ ਹੈ। ਹਾਜੀ। ਸੰਤ ਜਿਵੇਂ ਸੁਣੇ ਸਰਬ ਸ਼ੋਭ भजन ਸਰਬ ਵਿਆਪੀ RAM ਸੰਗ ਰਚਨ। ਸਰਬ ਵਿਆਪੀ RAM ਜਿਹੜਾ ਸਰਬ ਵਿਆਪੀ ਰਖ ਦੇਖੋ RAM ਇਹਨਾਂ ਵਾਲਾ ਜਿੱਦੇ ਵਾਲਾ ਲਿਆ। ਸਰਬ ਵਿਆਪੀ ਸਰਵ ਇਹ ਸਰਵ ਰਾਮ ਜੀ ਆਪਣੇ ਕਹਿ ਦਿੰਦੇ ਜੁਤੇ ਵਾਲੇ ਫਿਰ ਮੰਦਿਰ ਹੀ ਨਹੀਂ ਜੇ ਸਰਵ ਵਿਆਪੀ ਰਾਮ ਜੀ ਵਿਆਖਿਆ ਕਰ ਦਈਏ ਮੰਦਿਰ ਨਹੀਂ ਬਣਾ ਸਕਦੇ ਜੁਤੇ ਅਜਿਹੇ ਵਿਆਪੀ ਦਾ ਕਦੇ ਬਣਾ ਲੋ ਉਹ ਲੋੜ ਹੈ ਜੀ ਸਰਵ ਮੰਦਿਰ ਰਾਮ ਦਾ ਮੰਦਿਰ ਤੁਹਾਡੇ ਨਾਲ ਹੈ ਸਭ ਦੇ ਉਹਨੇ ਆ ਬਣਾ ਕੇ ਭੇਜਿਆ ਸਭੇ ਕਾਹ ਰਾਮ ਬੋਲਦਾ ਸਾਰੇ ਗੱਡ ਆ ਰਾਮਦਾਸ ਨੂੰ ਦਰਦ ਮਨੰਦਰ ਰਹਿ ਗਈ ਹੈ ਬਾਦ ਮੰਦਰ ਨੰਬੇ ਉਹ ਮਾਰੇ ਮੰਦਰਾ ਰਾਮਦਾਦਾ ਸਾਰਿਆਂ ਚ ਬਾਗੇ ਭੇਜਿਆ ਮੰਦਰ ਉਹਨੇ ਬਾਹਰ ਲੈ ਮੁੰਦਰਦ ਜੀ ਲੈਣਾ ਕੀਆ ਪਾਲਾ ਮੁੰਦਰਾ ਲੜਾਈ ਦੀ ਜੜ ਹੈ ਉਹਦਾ ਝਗੜੇ ਦੀ ਜੜ ਹੈ ਝਗੜਾ ਖੜਾ ਕਰਨਾ ਲੋਕਾਂ ਨੂੰ ਵੇਖੂਪਣਾ ਕੇ ਮਗਰ ਰੋਣਾ ਔਰ ਰਾਜ ਘਰਨਾ ਰਾਜ ਕਰਨ ਵਾਸਤੇ ਛੰਟਾ ਉਹ ਛੰਟਾ ਸਰਬਆਪੀ ਜਿਹੜਾ ਰਾਮ ਹੈ ਉਹਦਾ ਮੰਦਰ ਬਾਹਰ ਬਣੇ ਨਹੀਂ ਸਕਦਾੁੱਦਾ ਹੀ ਨਹੀਂ ਇਹ ਆਇਕ ਕਹਿਣਾ ਸਰਬਆਪੀ ਰਾਮ ਹੁੰਦਾ ਨਹੀਂ ਇਹ ਜਵਾਬ ਦੇਣ ਵੀ ਸਰਬਆਪੀ ਰਾਮ ਜਿਹੜਾ ਝੂਠੀ ਗੱਲ ਹੈ ਕਿਤਾਬਾਂ ზე ਬਿਧਾਏ ਪੜਨੇ ਆਤਾ ਅਸਲ ਤੇ ਜਿਹੜੇ ਸਿਆਸਤਦਾਨ ਨੇ ਉਹ ਵੀ ਧਰਮ ਦੀ ਫੜਦੇ ਪਾਗਲ ਜਿੱਦਣ ਉਹਨਾਂ ਨੇ ਤੁਹਾਨੂੰ ਪੜ ਲਿਆ ਇਹਨਾਂ ਨੂੰ ਘਟ-ਘਟਵਾਦਣਗੇ ਉਹ ਉਹ ਤਾਂ ਜੇ ਬੜ ਲੰਗਨੇ ਬੋਲਦੇ ਨੀ ਹੋ ਉਹਨੂੰ ਪਤਾ ਵੀ ਜੇ ਅਸੀਂ ਬੋਲ ਪਏ ਕਿਤੇ ਸੱਤ ਤੋਂ ਹਿੰਦੂ ਬੋਲ ਨਾ ਸੀ ਉਹ ਹੋਰ ਜਿਆਦਾ ਨੇ ਨਾ ਇਹਨਾਂ ਨੇ ਪਰ ਜੇ ਹਲੋ ਜੇ ਤਾਂ ਰਾਮਲੋਨੀ ਮੰਦ ਆਹੀ ਗੱਲ ਕਹ ਤੇ ਰਾਮਲੋਨੀ ਮੰਦ ਦੇ ਤਾਂ ਚ ਲੋਕਾਂ ਨੂੰ ਗੜਾ ਬਦਲ ਉਹ ਲੋਕਾਂ ਦੀ ਵਿਆਕਤਾ ਤੋਂ ਡਰਦੇ ਨੇ ਉਹ ਇਹਨਾਂ ਨੇ ਹੋਰੇ ਸਟ ਖੜਾ ਕਰਕੇ ਲੋਕਾਂ ਦੇ ਤਾਂ ਸੁਣਨੀ ਉਹ ਨਹੀਂ ਗੱਲ ਸਭ ਸ਼ਰਾਰਤੀ ਨੇ ਸਭ ਜਾਣਦੇ ਨੇ ਉਹ ਦੂਏ ਵਿਚਾਰੇ ਤਾਂ ਨਹੀਂ ਬੋਲਦੇ ਵੀ ਲੋਕਾ ਜੋ ਸਿਆਣੇ ਨਹੀਂ ਹੈਗੇ ਬੁਰਖ ਦੇ ਵਿਸੂਸ ਕਰ ਲੈਣਾ ਸਾਡੀ ਚੰਗੀ ਗੱਲ ਦਾ ਵੀ ਮਹਿਸੂਸ ਕਰਕੇ ਸਾਡੇ ਗੱਲ ਪਾ ਦੇਣ ਉਹ ਵਾ ਸਾਰੀਆਂ ਗੱਲਾਂ ਜਾਗ ਪੁੱਜ ਕੇ ਨਹੀਂ ਕਹਦੇ ਪਤਾ ਹੁੰਦੇ ਹੋਏ ਵੀ ਨਹੀਂ ਕਹਿ ਸਕਦੇ ਅਗਿਆਨੀ ਨੇ ਲੋਕ ਅਗਿਆਨੀ ਰੱਖੇ ਨੇ ਇਹਨਾਂ ਬੁਰਖ ਬਣਾ ਕੇ ਰੱਖੇ ਹੋਏ ਜਿਨੀ ਜਾਤਾ ਤੇ ਸੀ ਇਹ ਰਹਿਤ ਸਤਿ ਵਜਨ ਸਾਧੂ ਸਭ ਕਹੇਦੇ ਜੇ ਜਤਾ ਜਿਹਨੇ ਜਾਣ ਲਿਆ ਨਾ ਉਸ ਦੀ ਇਹ ਰਹਿ ਚਿਸਕੀ ਇਹ ਰਹਿ ਉਸਲਾ ਜਿੰਨਾ ਪਸਾ ਕਿਹੜਾ ਪਸਾ ਸੀ ਸੰਤ ਜਿਨਾ ਦਾ ਪੇਖਣ ਸਭੋ ਬਰਮ ਸੰਤ ਜਿਨਾ ਦਾ ਪੇਖਣ ਸਭ ਬ੍ਰਹਮ ਆ ਜਿਹਨੂੰ ਗਿਆਨ ਆ ਉਹ ਦਾ ਪੇਖਣ ਉਹਦੇ ਰਹਿਤਾ ਜਿਹੜਾ ਬ੍ਰਹਮਾਰੇ ਜਾਣਦਾ ਬ੍ਰਹਮ ਕੀ ਹੁੰਦਾ ਘਟ ਘਟ ਮੰਨ ਹਰ ਜੂ ਬਸ ਜਿਹੜਾ ਜਾਣਦਾ ਜਿਹੜਾ ਬ੍ਰਹਮਾਰ ਬ੍ਰਹਮ ਦਾ ਫਰਕ ਜਾਣਦਾ ਬ੍ਰਹਮ ਬ੍ਰਹਮ ਪੂਰਨ ਬ੍ਰਹਮ আর ਪਰ ਬ੍ਰਹਮ ਬਾਰੇ ਜਿਹੜਾ ਜਾਣਦਾ ਫਰਕ ਕੀ ਹੈ ਚਾਰੇ ਸੇਜਾਂ ਦਾ ਉਹਦੀ ਰਹਿਤ ਹੈ ਇਹਨਾਂ ਦਾ ਬ੍ਰਹਮਾ আর ਬ੍ਰਹਮ ਦਾ ਇਹ ਨਹੀਂ ਬਤਾ ਕੀ ਹੁੰਦਾ ਤੇ ਆ ਵਿਆਖਿਆ ਕਰ ਇੱਕੋ ਹੀ ਹੈ ਬ੍ਰਹਮ আর ਬ੍ਰਹਮ ਨਾਮ ਨਾਲ ਬੁਣਾਇਆ ਹੈ ਜੇ ਪ੍ਰਭੂ ब्रह्मा ये तो ब्रह्मा का आदमी है चार वेद लिखे ना था चार वेद ब्रह्मा को दिए तो ब्रह्मा के अवतार नहीं बनते वो ब्रह्मा के अवतार नहीं हैगे इनन पूछे अवतार ब्रह्मा का होता है कोई ब्रह्मा का अवतार ब्रह्म का अवतार होता ਉਦਾਵਤਾਰ ਹੈ ਰਬਾ ਰਬ ਮੁਕਤਾ ਬ੍ਰਹਮ ਮੁਕਤਾ ਬ੍ਰਹਮਾ ਮੁਕਤਾ ਦੀ ਬ੍ਰਹਮ ਦੇਤਾਰੀ ਹੈ ਇੱਥੇ ਹੀ ਅੱਗੇ ਸਬ ਸ਼ਾਸਤਰਾਂ ਨੇ ਸਬ ਕਹਿੰਦੇ ਆ ਕਰਨਾ ਜਿਹੜਾ ਵੀ ਲਾ ਕੇ ਇਹਦੇ ਅਰਥ ਬਦਲ ਲੈ ਬ੍ਰਹਮ ਜਿਹੜਾ ਹੈ ਜਿੱਥੇ ਕਰਨਾ ਲੱਗਿਆ ਹੂੰ ਉਹਦਾ ਦੇਤਾਰੀ ਹੈ ਆਖਰੀ ਲਫਜ਼ ਮੁਕਤਾ ਨਹੀਂ ਹੈ ਬਪਾ ਮੁਕਤਾ ਚਾਹੀਦਾ ਬ੍ਰਹਮ ਬ੍ਰਹਮਪਦਾ ਬਪਾ ਮੁਕਤਾ ਹੈ ਤਾਂ ਮੁਕਤ ਹੈ ਪ੍ਰਭੂ ਬ੍ਰਹਮ ਮੁਕਤ ਹੈ ਬ੍ਰਹਮਾ ਦੇਤ ਆ ਰਹੀ ਹੈ ਅੰਸ਼ਾ ਜਿਹੜੀ ਉਹ ਬ੍ਰਹਮ ਗਿਆਨ ਬ੍ਰਹਮਾ ਲੈ ਰਿਹਾ ਗਿਆਨ ਬ੍ਰਹਮਾ ਕਹਿ ਨਹੀਂ ਰਿਹਾ ਉਸੇ ਤੂੰ ਬ੍ਰਹਮਾ ਦੇ ਅਵਤਾਰ ਲੈਣ ਕਰ ਬ੍ਰਹਮਾ ਦਾ ਅਵਤਾਰਾ ਬ੍ਰਹਮਾ ਬਣ ਕੇ ਆਇਆ ਉਹ ਖੁਦ ਬ੍ਰਹਮਾ ਹੈ ਉਹ ਬ੍ਰਹਮਾ ਨੇ ਅਵਤਾਰਤਾ ਰਿਹਾ अवतार धारण है ब्रह्मा ज्ञानवान हुए है पूरो ये जीव खुद है ब्रह्मा मंडल ज्ञान है के ब्रह्मा वासनी है आजले ब्राह्मण है एकावर्ण ब्राह्मण सारे ब्रह्मा का अवतार है ताहे कह दे ब्रह्मा ने मुख से पैदा होना है ब्रह्मा ने मुख से पैदा होने असल में ब्रह्म के मुख से पैदा होने प्रभु के मुख से पैदा होए ਉਹ ਰਾਗ ਬੋਲਦਾ ਬ੍ਰਹਮਾ ਰਾਗ ਬੋਲਦਾ ਉਹਦੇ ਮੁੱਖੋਂ ਪੈਦਾ ਹੋਏ ਨੇ ਜੋ ਨੇ ਸਿੱਖਿਆ ਦਿੱਤੀ ਹੈ ਬੋਲ ਕੇ ਉਹ ਬੰਦੀ ਹੈ ਨਾ ਕਬਈਆ ਤਾਂ ਗਿਆਨवान ਹੋ ਗਏ ਇਹ ਬ੍ਰਹਮ ਦੇ ਉਤਾਰ ਨੇ ਸਾਰੇ ਬ੍ਰਹਮ ਦਾ ਆਤਾਰ ਬ੍ਰਹਮਾ ਬਣ ਜਾਂਦਾ ਪਰ ਬ੍ਰਹਮ ਬ੍ਰਹਮਨੀਨ ਹੋ ਜਾਂਦਾ ਬ੍ਰਹਮਾ ਹੀ ਬ੍ਰਹਮਨੀਨ ਹੁੰਦਾ ਉਹ ਨਹੀਂ ਕੋਈ ਹੋ ਸਕਦਾ ਪਰ ਇਹਨਾਂ ਨੇ ਗਿਆਨ ਦਾ ਛੱਡ ਦਿੱਤਾ ਇਹ ਚੋਪਕ ਛੜਦਾ ਕਿ ਬ੍ਰਹਮਾ ਹੀ ਬ੍ਰਹਮੀਨ ਹੋ ਸਕਦਾ ਹੋਰ ਕੋਈ ਨਹੀਂ ਹੋ ਸਕਦਾ ਇਹ ਕਹਿੰਦੇ ਬ੍ਰह्मलीन ਹੋਣਾ ਜੀਵਨ ਆ ਲਾ ਲਿਆ ਬ੍ਰह्म ਗਾਇਬ ਕਰਤਾ ਬ੍ਰਹਮਾ ਲਾ ਲਿਆ ਬੇਤਾਰੀ ਕਹੇ ਜਲੀਨ ਹੋਣਾ ਕੋਈ ਨਹੀਂ ਸਕਦਾ ਕੋਈ ਹੋਇਆ ਵੀ ਹੈ ਦੱਸੋ ਕਿਵੇਂ ਹੋਊਗਾ ਉਹ ਦੱਸੋ ਸਮਝਾਓ ਕੋਈ ਸਮਝਾਉਣ ਦੀ ਲੋੜ ਨਹੀਂ ਸਿਰਫ ਬ੍ਰਹਮਾ ਨੇ ਲੀਨ ਹੋਣਾ ਜਿਹੜਾ ਗਿਆਨੀ ਹੈ ਜਾਦੀ ਬ੍ਰਹਮ ਉਹਨੇ ਆਪਣੇ ਭੂੜ ਚ ਲੀਨ ਹੋਣਾ ਜੀਵ ਨੇ ਬ੍ਰਹਮ ਖੁਦ ਬਣਨਾ ਗਿਆਨवान ਖੁਦ ਬਣਨਾ ਬ੍ਰਾਹਮਣ ਨੇ ਬ੍ਰਹਮ ਕਹੇ ਕਬੀਰ ਜੋ ਬ੍ਰਹਮ ਵਿਚਾਰਾ ਜੋ ਬ੍ਰਹਮ ਦੀ ਵਿਚਾਰ ਕਰੂਗਾ ਬ੍ਰਹਮ ਦੀ ਵਿਚਾਰ ਕਰ ਚੰਪਨਪਨ ਹੋ ਜਾਊਗਾ ਉਹ ਦੈਟ ਇਜ਼ ਬ੍ਰਹਮ ਉਹ ਬ੍ਰਹਮ ਹੈ ਉਹ ਆਪਣੇ ਲੀਨ ਹੋ ਸਕਦਾ ਆਪਣੇ ਭੂੜ ਚ ਇਹ ਗੱਲ ਕਿਤੇ ਦੀ ਗੈਰ ਹੈ ਕੋਈ ਉਹ ਕਾਸ਼ੇੜਾ ਤੇ ਫਸਿਆ ਸੀ ਜਦੋਂ ਉਹ ਦੱਸਿਆ ਫਿਰ ਉਹਦੇ ਹਜ਼ਾਰ ਕਹਾੜਾ ਪਾਉਣ ਦਾ ਬਹਿ ਗਿਆ ਸਰ ਉਹ ਗੱਲ ਨਹੀਂ ਖਤਮ ਜਵਾਬ ਕੋਈ ਬ੍ਰਹਮਾ ਬੜਾਕ ਜਾਸ ਪਾਇਆ ਬ੍ਰਹਮਾ ਦਾ ਪੈਦਾ ਕੀਤਾ ਹੈ ਉਹ ਪੈਦਾ ਕੀਤੇ ਕੋਈ ਚੀਜ਼ ਲੀਡ ਕੇ ਮੈਂ ਜਿਹੜਾ ਪੈਦਾ ਹੋਇਆ ਲੀਨ ਹੋ ਹੁਣ ਪ੍ਰਕਿਰਸ਼ਨ ਕੀਤੀ ਸੀ ਭਗਤਾਂ ਨੇ ਦੇਈ ਬਨਾਨੇ ਫੇਲ ਗੋਲੀ ਪਰ ਜਾਨ ਨਹੀਂ ਕੀਤਾ ਬ੍ਰਹਮਾ ਬੜਾ ਸਦਾ ਵੀ ਇਹਦਾ ਬ੍ਰਹਮਾ ਨੂੰ ਬੜਾ ਤੁਸੀਂ ਉਹ ਛੋਟਾ ਹੈ ਤਾਂ ਜਾਂ ਸੋ ਉਪਾਇਆ ਪੈਦਾ ਕਿਨੇ ਕੀਤਾ ਬ੍ਰਹਮਣ ਨੇ ਪੈਦਾ ਕੀਤਾ ਕੀਤਾ ਬ੍ਰਹਮਣ ਨੇ ਬ੍ਰਹਮਣ ਨੇ ਬ੍ਰਹਮਾ ਪੈਦਾ ਕੀਤਾ ਜੀ ਗਿਆਨ ਪੂਰਾ ਕਰਵਾਤੇ ਜਿੱਦਾਂ ਬ੍ਰਹਮ ਦਾ ਬ੍ਰਹਮਾ ਦਾ ਗਿਆਨ ਪੂਰਾ ਹੋ ਗਿਆ ਉਹ ਆਪਣੇ ਮੂਡ ਚ ਲੀਡ ਹੋ लीन होके होगा, फिर की होगा पूर्ण ब्रह्म ये ब्रह्मा ਜਿਹੜਾ है, यह पूरा नहीं ਨਹੀਂ ਹਦਾਈ ਹੁੰਦਾ ਅੱਧਾ ਆਪਣਾ ਹਿੱਸਾ ਵਾਰ ਕੱਢਦਾ ਉਹ ब्रह्मा ਦੇ ਰੂਪ ਚ ਅੰਸ਼ਾ অবতার ਕਹਤੇ ਕਾਲ ਵਸ ਭਏ ਹੈ ਇਹਨੂੰ ਅੰਸ਼ਾ অবতার ਕਹਿੰਦੇ ਨੇ ਇਹ ਸਾਰਾ ਇਹਦਾ ਬ੍ਰਹਮ ਅੰਸ਼ਾ অবতার ਆ ਪੂਰਾ ਕਦੇ ਵੀ ਦੇ ਜਾਂਦਾ ਪੂਰੀ ਜੋਤ ਕਦੇ ਵੀ ਜਦ ਜੋਤ ਪੂਰੀ ਹੁੰਦੀ ਆ ਪੂਰੀ ਚਾਹੇ ਅਧੂਰੀ ਹੋਵੇ ਪੂਰੀ ਪੂਰੀ ਜੋਤ ਨਹੀਂ ਆ ਸਕਦੀ ਬਾਹਰ ਦੇ ਵਿੱਚ ਇੱਕ ਪੈਰ ਪਿੱਛੇ ਰਖੂਗੀ ਜੇ ਤੂੰ ਲੱਜ ਸਾਰੇ ਉਹ ਗੁਰੂ ਸੱਜਣਾਂ ਸਣੇ ਰੋਲ ਖੜਾ ਰਿਹਾ ਪਾਣੀ ਕਿੱਥੋਂ ਲੈ ਲੇਗਾ ਉਹ ਕਿੱਸਾ ਹੱਥ ਜੇ ਰਖਣਾ ਪੈਦਾ ਇੱਕ ਸੜਾ ਲੱਜ ਦਾ ਬੜਾ ਬਾਟੀਆਂ ਛਣ ਇਕ ਜਦਾ ਜਿਹੜਾ ਬਡੇ ਬਾੜੀ ਨੂੰ ਉਹ ਜਿੱਦ ਨਹੀਂ ਮੈਂਦੀ ਖੂਜ ਤਾਂ ਪਾਣੀ ਬਾਹਰ ਆਉਂਦਾ ਜੇ ਦੋਏ ਸਿਰੇ ਸੰਦੀ ਫਿਰ ਗਈ ਬਾੜੀ ਅੰਦਰ ਕਾਜ ਦੋਏ ਉਹ ਗੁਰ ਕਹਦੀ ਆਉਂਦੀ ਉਹ ਇਹ ਕਿਤਾ ਬਾਾਰੇ ਪਿਆ ਖੂਦ ਜਿਹੜਾ ਖੁਦ ਬ੍ਰਹਮਾ ਆ ਮਾਇਆ ਜਿਹੜੀਆਂ ਮਾਇਆ ਦੇ ਪਰੇ ਖੜਿਆ ਉਹਨੂੰ ਭਰਾਇਆ ਵੀ ਇੱਥੋਂ ਪਾਣੀ ਰੱਜ ਕੇ ਪੀ ਕੇ ਬਾਹਰ ਆ ਜਾ ਦੋਰ ਆਪਣੇ ਹੱਥੇ ਜਾ ਪ੍ਰਭ ਡੋਰੀ ਉਹ ਕਿਹੜੀ ਡੋਰੀ ਹੈ ਉਹ ਕਿਹਣੀ ਡੋਰੀ ਆ ਜਾ ਖਤਰਾ ਹੁੰਦਾ ਜਦ ਖਿੱਚ ਕੇ ਸਣਾ ਬੜਾ ਵਿਚਲ ਜਾਂਦਾ ਉਹ ਬਾਹਰ ਜੇ ਐਕਸੀਡੈਂਟ ਹੋਣ ਲੱਗਦਾ ਕਿ ਸਿਕੰਡ ਜੀ ਬਾਹਰ ਆ ਜਾਂਦਾ ਹੈ ਪ੍ਰਭ ਹੋ ਜਾਂਦਾ ਉਹ ਕਿਹਣੀ ਡੋਰੀ ਆ ਜੇ ਸਣਾ ਬਾਲਟੀ ਆ ਜਾ ਖੜਾ ਰਹਿ ਫਿਰ ਬਾਹਰ ਪਹਿਲਾਂ ਆਈਆ ਪਹਿਲਾਂ ਜਪਣੀ ਰਹਿ ਕੇ ਲਜੂ ਦੀ ਗੁਰੂ ਨਾਲ ਗੱਲ ਹੀ ਬਾਤ ਦੇ ਹੋਈ ਆ ਜੀ ਲਜੂ ਕੀ ਲੋੜਾ ਜਿਹੜਾ ਚੀਨੀ ਰੱਖਣੀ ਕਦੇ ਵੀ ਨਹੀਂ ਐਸਾ ਹੋ ਸਕਦਾ ਕਿ ਬ੍ਰਹਮ ਜਿਹੜਾ ਹੈਗਾ ਆਪ ਦੇ ਤਾਰ ਲਵੇ ਬ੍ਰਹਮ ਬਾਹਰ ਦਾ ਆਪਣਾ ਧਿਆਨ ਜਿਹੜਾ ਹੈ ਦੁਆ ਹੈ ਧਿਆਨ ਦੂਏ ਪਾਸੇ ਬਾਹਰ ਦੇ ਵਿੱਚ ਲੈ ਕੇ ਜਾਂਦਾ ਧਿਆਨ ਦਾ ਹੀ ਗਿਆਨ ਲੈਂਦਾ ਧਿਆਨ ਤੋਂ ਤਨ ਮਨ ਧਿਆਨ ਧਿਆਨ ਮੈਂ ਜਾਂਦਾ ਜੋ ਸੁਣ ਵੀ ਰਿਹਾ ਇੱਥੇ ਕੰਨਾਂ ਦੇ ਨਾਲ ਧਿਆਨ ਲਾ ਕੇ ਗੱਲ ਸੁਣ ਰਿਹਾ ਆ ਬਾਹਰ ਬੈਠਾ ਬਰਮ ਬਾਹਰੇ ਬੈਠਾ ਮਾਰਾ ਤੇ ਬਾਹਰੇ ਬੈਠਾ ਸੁਣਦਾ ਤੇ ਤਨ ਹੀ ਮਾਰਾ ਦੇ ਵਿੱਚ ਬਿਲਕੁਲ ਨਹੀਂ ਫਿਰਦਾ ਜਿਹੜਾ ਹੈਗਾ ਮਾਇਆ ਤੋਂ ਪਰੇ ਦੀ ਚੀਜ਼ ਹੈ ਫਿਰਦਾ ਮਾਇਆ ਤੋਂ ਪਰੇ ਹੀ ਹੁੰਦਾ ਉਹਦਾ ਹਿਰਦਾ ਜਨਵਾਸ ਕਰਦਾ ਹਿਰਦਾ ਉੱਥੇ ਦਾ ਉੱਥੇ ਮਾਇਆ ਦਾ ਮੋਹ ਹੈ ਮਾਇਆ ਨਹੀਂ ਹੈ ਉੱਥੇ ਮਾਇਆ ਦਾ ਮੋਹ ਹੋਣਾ ਹੋਰ ਗੱਲ ਹੈ ਮਾਇਆ ਹੋਣੀ ਹੋਰ ਗੱਲ ਹੈ ਮਾਇਆ ਦਾ ਮੋਹ ਪਿਆ ਹੋਵੇ ਮਾਇਆ ਤਾਂ ਨਹੀਂ ਗਰੋਧ ਹੋਵੇ ਉਹ ਗੱਲਾਂ ਲੱਗਣੇ ਗੁੱਸਾ ਹੋਵੇ ਭੰਤੇ ਹੋਵੇ ਵੀ ਕੰਮ ਨਹੀਂ ਕਰਦਾ ਪਰ ਮਾਇਆ ਨਹੀਂ ਹੁੰਦਾ ਤੇ ਅਨਸਾ ਉਤਾਰ ਕਹਿੰਦੇ ਕਾਲ ਵਸ ਪਏ ਹੈ ਸਾਰੇ ਕਾਲ ਵਸ ਰਹੇ ਹਨਸਾ ਹੁੰਦੇ ਨੇ ਪੂਰਾ ਕਦੇ ਵੀ ਜਿਹੜੀ ਹਾਂ ਜਦ ਪੂਰਾ ਉਤਾਰ ਹੁੰਦਾ ਫਿਰ ਮਾਇਆ ਦੇ ਬਾਹਰ ਹੁੰਦਾ ਸਤਗੁਰ ਕੇ ਜਨਮ ਉਹ ਪੂਰੇ ਦਾ ਅਵਤਾਰ ਦਾ ਜਿਹੜਾ ਹੁੰਦਾ ਉਹਦੇ ਵਾਸਤੇ ਤਾਂ ਸਾਰਾ ਕੁਝ ਹੋ ਰਿਹਾ ਜਦ ਪੂਰਨ ਬ੍ਰਹਮ ਹੁੰਦਾ ਫਿਰ ਜਾਂਦੈ ਖੋਇਤਾ ਉਹ ਪੂਰੇ ਦਾ ਅਵਤਾਰ ਪੂਰੇ ਦਾ ਅਵਤਾਰ ਦੇ ਹੁੰਦਾ ਪੂਰੀ ਜੋਦ ਦਾ ਰਾਗ ਹੁੰਦਾ ਐ ਦੁਨੀਆ ਜਿਹੀ ਹੁੰਦਾ ਉਹ ਸੱਚ ਗੱੜਜ ਹੁੰਦਾ ਅਨਸਾਹਵਤਾਰ ਐ ਐ ਦੁਨੀਆ ਹੁੰਦੇ ਨੇ ਐ ਦੁਨੀਆ ਜਿਹਾ ਹੁੰਦਾ ਹੀ ਅਖਾਵਤਾਰ ਨਹੀਂ ਇਹ ਗੱਲ ਦਾ ਜੇ ਪ੍ਰਚਾਰ ਕਰ ਦੇਣਾ ਭਗਵਾਨ ਕੋਈ ਵੀ ਨਹੀਂ ਹੋ ਸਕਦਾ ਇੱਥੇ ਗੁਰੂ ਕੋਈ ਵੀ ਨਹੀਂ ਹੋ ਸਕਦਾ ਨਹੀਂ ਤੇ ਕੋਈ ਭਗਵਾਨ ਹੋ ਸਕਦਾ ਨਹੀਂ ਤੇ ਕੋਈ ਗੁਰੂ ਹੋ ਸਕਦਾ ਜੇ ਭਗਵਾਨ ਹੋ ਉਹਦਾ ਅਰਥ ਗੱਲ ਦਾ ਕਿਸਮਤ ਵਾਲਾ ਚੰਗੇ ਕਰ ਕਰਨ ਚੰਗੀ ਕਿਸਮਤ ਵਾਲਾ ਜਿਹਨੇ ਆਕੇ ਆਪਣਾ ਕਾਫਨ ਵੇਲ ਲਿਆ ਚੰਗੀ ਕਿਸਮਤ ਵਾਲਾ ਉਹਦੇ ਹੱਥੋਂ ਭਗਵਾਨ ਤੋਂ ਭਗਵਾਨ ਰੋਹਾਂ ਦਾ ਆਸ ਪਰਮੇਸ਼ਰ ਨਹੀਂ ਹੋ ਸਕਦਾ ਬੱਦੇ ਵੀ ਨਹੀਂ ਹੋ ਸਕਦਾ ਪਰਮੇਸ਼ਰ ਜਿਹਨੇ ਆਪਣਾ ਆਪਾ ਕਹਿੰਦਾ ਬੱਚਾ ਬਹੁਤ ਵੱਡਾ ਲੇ ਕੇ ਪਾਸ ਹੋ ਗਿਆ ਭਈ ਕਰਮਾ ਵਾਲਾ ਹੈ ਹੈ ਭਗਾ ਵਾਲਾ ਪਰਮਾ ਵਾਲਾ ਉਹ ਜਿਹਨੇ ਆਪਣਾ ਕੰਮ ਸਹੀ ਕੀਤਾ ਭਗਾਣ ਚੱਤੇ ਰਸਤੇ ਪਿਆ ਹੈ ਭਗਾਣ ਫਿਊਚਰ ਆਪਣਾ ਸੰਭਾਲ ਲੈ ਭਗਾਣ ਹਾਂਜੀ ਜਿੰ ਜਾਤਾ ਤਿਸ ਕੀ ਰਹਿਤ ਜਿੰ ਜਾਤਾ ਜਿੰ ਨੂੰ ਸਾਰੀ ਗੱਲ ਦੀ ਸਮਝ ਹੈ ਉਹ ਸਾਰਿਆਂ ਚ ਦੇਖਦਾ ਠੜਕੜ ਮੇਰੇ ਹਰਜੂ ਉਹ ਜੋਰ ਤੇ ਉੱਤੇ ਟਿਕਾ ਨਿਗਾਹ ਰੱਖਦਾ ਜਾਂ ਤੇ ਨਹੀਂ ਰੱਖਦਾ ਇਹਦਾ ਅਗਲਵਾ ਪੰਡਤ ਨੇ ਜਾਦੂ ਦੀ ਜਾਤੇ ਰੱਖੀ ਅਸਮਲ ਸ਼ਾਸਤਰਾਂ ने, ਵੇਦ ਵਿੱਚੋਂ ਥੱਲੇ ਡਿਗੇ ਨੇ ਸਮਲ ਸ਼ਾਸਤਰ ਬਣਾਏ ਨੇ ਤਾਂ ਜੂਈ ਜੋਤੋਂ ਰੱਖ ਕੇ चक के ਕੇ रखती, चार ਚਾਰ ਬਾਰ ਬਣਾ ਲਏ ਫਿਰ ਕੀ ਸੀ ਰੋਵੇ ਪੰਡਤ ਗਿਆਨ ਗਿਆਨ ਕਵਾਏ ਪਟਦੀ ਦਾਨੀ ਕੀ ਮਤਲਬ ਨਹੀਂ ਜੀ ਹੋਣ ਮੂਰਕ ਪੰਡਤ ਮੂਤੇ ਗਾਣਾਂ ਪੰਡਿਤ ਦੀ ਬੇਝੀ ਬੱਚੇ ਵੀ ਕਰ ਦਿੰਦੇ ਨੇ ਅਗੋ ਕੁਝ ਨਹੀਂ ਕਹਿ ਸਕਦਾ ਕੋ ਗਿਆਨ ਕੋ ਆਇਆ ਗਿਆਨ ਹੋਇਆ ਦੂਜੇ ਪੜਾ ਵਾਰਾ ਖਤਰ ਗਿਆਨ ਹੋ ਗਿਆ ਦੂਜੇ ਪੜਾ ਗਰਮ ਗਲੇ ਬਿਖ ਖਾਇਆ ਗਲ ਗਿਆ ਗਰਮ ਦੇ ਸਾਰੇ ਗੁਣ ਪੰਡਿਤ ਹਰਸ ਹਰਸ ਹੈ ਇਹ ਗੁਰਬਾਣੀ ਦਾ ਨਾਦ বেদ ਨਾਦ ਦਾ বেদ ਗਿਆਨ ਦੇਖ ਪਾਵਾ ਇਹ ਜਿੰਦਾ ਲੱਗਦਾ ਉਹ ਥੋੜਾ ਲੱਗਦਾ ਸੱਚ ਹਰ ਰਸਾਂ ਆਦ ਬੇਦਨੀ ਪਾਵਾ ਸੁਣੀਏ ਗਹਿਰ ਕਬੀਰ ਗਵਾਇਆ ਤੋਕਾਰ ਤੂੰ ਜੀ ਜਾਨੋ ਗੋਲ ਇਹ ਪੰਡਤ ਦੀ ਹੈ ਉਹੀ ਜੂਰੀ ਸਾਡੇ ਆ ਲੱਗੂਗਾ ਜੀ ਇਸ ਕਰਕੇ ਪੰਡਤਾਰੇ ਇਕੱਠੇ ਖੜੇ ਨੇ ਇਹ ਨਵੇਂ ਪੰਡਤ ਨੇ ਉਹ ਡੁਪਲੀਕੇਟ ਬਾਣੀ ਪਾਇਆ ਹੈ ਔਰ ਤਾਂ ਕੁਝ ਨਹੀਂ ਕਲਪ ਕਲਪ ਦਾ ਉਹੀ ਪਰਨਦਾ ਨਹੀਂ ਸਵੇਰੇ ਉਠਣਾ ਪੂਜਾ ਪਾਠ ਕਰਨੇ ਕਲਵਾ ਤਾਂ ਉਹੀ ਅਸਰੀ ਤੂੰ ਬਸਤੀ ਕਰਨੇ ਜਿਤਨੇ ਗੱਲਨੇ ਉਹੀ ਕੀ ਫਰਕ ਹੈ ਹਰ ਕੁਝ ਹੋ ਨਹੀਂ ਕਲ ਮਾਇਆ ਦੀ ਹੋਈਆ ਕਲ ਸੱਚ ਦੇ ਸੱਚ ਨਾਲ ਅੰਦਰੋਂ ਨਫਰਤ ਹੀ ਹੈ ਜਾਣ ਨਾਲ ਨਫਰਤ ਹੀ ਹੈ ਜਾਂਦੀ ਕਿਉਂਕਿ ਗਿਆਨ ਇਹਨਾਂ ਦੇ ਘੋੜ ਸਭ ਕਰ ਆਪਣੇ ਘੋੜ ਨਹੀਂ ਕੋਈ ਚੌਦਾ ਸੁਣਨੀ ਆਪਣੇ ਕੰਮੇ ਸੁਣਦੇ ਨਹੀਂ ਚਲਦਾ ਕੋਈ ਹਾਂਜੀ ਜਿਹਨ ਜਾਤਾ ਤਿਸ ਦੀ ਇਹ ਰਹਿਤ ਜਿਹਨ ਜਾਤਾ ਜਿਹਨੇ ਜਾਣ ਲਿਆ ਗਈ ਜਿਹਨੇ ਬ੍ਰਹਮ ਜਾਣ ਲਿਆ ਜਿਹੜਾ ਬ੍ਰਹਮ ਗਿਆਨੀ ਆਤਮ ਦਰਸੀ ਹੈ ਜਿਹਨੇ ਆਤਮਾ ਦਾ ਦਰਸ਼ਨ ਕਰ ਲਿਆ ਤਿਸ ਇਹ ਰਹਿਤ ਉਹਦੀ ਇਹ ਰਹਿਤਾ ਕੀ ਰਹਿਤੀ ਹੈ ਸਤਿਵਿਦਿਆ ਦਾ ਵੀ ਆ ਗਿਆ ਤੇ ਰਹਿਤ ਕੱਲਾ ਰਹਦਾ ਵਰੇ ਆਜ਼ਾਦੀ ਆਨੀ ਵਰੇ ਹਉਦੀ ਹੋਣੀ ਰਹਤ ਰਾਤ ਪਿਆਰੀ ਬੁਝ ਕੋ ਆ ਰਹਤ ਪਿਆਰੀ ਸੀ ਰਾਤ ਕੀ ਜੋਤ ਤੇ ਰੀਤੀ ਰਖੋ ਜਾਤੇ ਤੇ ਰੀਤੀ ਨਹੀਂ ਰਖਣੀ ਇਹਦਾ ਬਾਪ ਕੀ ਖਫ ਕਰਦਾ ਸੀ ਪਿਛੇ ਤੇ ਕੀ ਕੰਮ ਕਰਦੇ ਆਏ ਨੇ ਸਾਨੂੰ ਕੀ ਬਸ ਇਹਦੀ ਸੋਚ ਕੀ ਹੈ ਉਹ ਇਹਦਾ ਕਿੱਤਾ ਕੀ ਹੈ ਤੇ ਅਸੀਂ ਬਦਲ ਨਹੀਂ ਕਿੱਤਾ ਕੀ ਹੈ ਉਹ ਮਤਲਬ ਨਹੀਂ ਇਹਦੀ ਸੋਚ ਕਿੱਧਰ ਹੈ ਕਹੇ ਜੀ ਉਹਦੇ ਦੀ ਮਤਲਬ ਹੈ ਇਹ ਸੋਚ ਆਲਾ ਦੇਸ਼ੀ ਗੁੰਡਾ ਹੈ ਕਿੱਤੇ ਆਲਾ ਦੇਸ਼ੀ ਗੁੰਡਾ ਸਭ ਕੁਝ ਜਿਹੜਾ ਗੰਦ ਜਿਹੜੇ ਸ਼ੂਤ ਜਿਹਨਾਂ ਨੂੰ ਕਹਿੰਦਾ ਰਹੇ ਜਿਹੜੇ ਆਪਣੇ ਬਾਲਮੀਕੀ ਨੇ ਉਹ ਬਾਹਰ ਹੱਥਾਂ ਨੂੰ ਜਿਨ ਲੱਗ ਜਾਂਦਾ ਥੋੜੇ ਦੰਦਰ ਪਰ ਆਪ ਤੁਸੀਂ ਉਹਨਾਂ ਨੂੰ ਚੰਗੇ ਤੋਂ ਉਹ ਤੁਸੀਂ ਅੰਦਰ ਲਈ ਫਿਰਦੇ ਉਹਦੇ ਬਾਰੇ ਆ ਤੁਸੀਂ ਪੈਦਾ ਕਰਦੇ ਹੋ ਉਹ ਸਾਗਤੋਂ ਸਾਗਤ ਤੋਂ ਸ਼ੁਕਰਪਾਲਾ ਸ਼ੁਕਰਪਾਲਾ ਪੜ੍ਹਦੇ ਹੋ ਉਹ ਤੁਹਾਡੀ ਸਫਾਈ ਕਰਦੇ ਨੇ ਕਬੀਰ ਨੇ ਕੀ ਕਿਹਾ ਦੀ ਅਸਲ ਸ਼ੁਕਰ ਉਹ ਨਹੀਂ ਸੀ ਕਿਹਾ ਇਹਨਾਂ ਨੂੰ ਕਿਹਾ ਸੀ ਸ਼ੁਕਰ ਉਹ ਕਿਵੇਂ ਕਹਿ ਦਿੰਦਾ ਇਹਨਾਂ ਨੂੰ ਵਿਚਾਰਾ ਸ਼ੁਕਰ ਦੀ ਪ੍ਰਮਾਣ ਦੇਤਾ ਇਹ ਗੱਲ ਪਾ ਜਾਂਦੇ ਇਹ ਗੱਲ ਪਾ ਦਿੰਦੇ ਕਬੀਰ ਦੇ ਜੇ ਇਹਨਾਂ ਦੀ ਗੱਲ ਕਰ ਦਿੰਦਾ ਸਿੱਧੀ ਜੇ ਇਹਨਾਂ ਦੀ ਵਾਲਮੀਕੀ ਆਂਦੀ ਗੱਲ ਕਰ ਦਿੰਦਾ ਨਾ ਇਹ ਰੂਪ ਪੱੜ ਗਲ ਪਾ ਦੱਕ ਕਬੀਰ ਦੇਖੋ ਤੁਹਾਨੂੰ ਕੀ ਕਹਿਣਾ ਕਬੀਰ ਇਹ ਤਾਂ ਇਹਨਾਂ ਦੇ ਹੱਕ ਦੀ ਗੱਲ ਆ ਤੋੜਾ ਨਾ ਪੜਨਾਂ ਕਰਦੇ ਨੇ ਗੱਲ ਦਾ ਇਹ ਕਹੀ ਆ ਪਰ ਇਹ ਵਿਚਾਰੇ ਇੰਨੇ ਗਿਆਨ ਨਹੀਂ ਰੱਖਦੇ ਇਹਨੂੰ ਗੜਬਾ ਦੇਣਾ ਸੀ ਗਾ ਦੇਖੋ ਕੀ ਕਹਿੰਦਾ ਤੁਹਾਨੂੰ ਸ਼ੁਕਰ ਕਰਤਾ ਸਾਕਤ ਜੀਵਨ ਸ਼ੁਕਰ ਭਲਾ ਸਾਕਤ ਦੇ ਅੰਦਰ ਗੰਦਾ ਉਹ ਬਾਹਰ ਹੱਥਾਂ ਨਾਲ ਸਾਫ਼ ਕਰਦਾ ਜਗੰਦ ਉਹ ਤੁਹਾਡਾ ਚੰਦਾ ਤੁਸੀਂ ਗੰਦ ਪਾਉਂਦੇ ਹੋ ਉਹਨੂੰ ਸਾਫ਼ ਕਰਦਾ ਤੇ ਭਗਤ ਵੀ ਗੰਦ ਉਹ ਸਾਫ਼ ਕਰਦਾ ਹੋਰ ਕੀ ਕਰਦਾ ਭਗਤ ਵੀ ਸੁੱਕ ਰਿਹਾ ਤੁਸੀਂ ਗੰਧ ਫਲਾ ਰਹੇ ਹੋ ਲੋਕਾਂ ਦੇ ਸੰਸਾਰ ਵਿੱਚ ਉਹ ਗੱਦ ਸਾਫ਼ ਕਰ ਰਿਹਾ ਤੇ ਫਿਰ ਜਿਹੜੇ ਬਾਲਵੀ ਕਹਿੰਦੇ ਤਾਂ ਫਿਰ ਭਗਤ ਹੋਏ ਤੇ ਭਗਤੀ ਕਰਦੇ ਨੇ ਫਿਰ ਓਏ ਓ ਮਾਇਆ ਦੀ ਭਗਤੀ ਲਾ ਲੋ ਮਾਇਆ ਦੇ ਪੱਖੋਂ ਕਰਦੇ ਨੇ ਭਗਤੀ ਉਹ ਜੋਤ ਦੇ ਪੱਖੋਂ ਭਗਤੀ ਕਰਦਾ ਜੱਗ ਦੇ ਪੱਖੋਂ ਭਗਤੀ ਕਰਦੇ ਨਹੀਂ ਤੁਸੀਂ ਉਹਨਾਂ ਨੂੰ ਨਫ਼ਰਤ ਕਰਦੇ ਹੋ ਸਾਖਤ ਜਿਹਨ ਸੁੱਖਰ ਪਾਲਾ ਅੱਛਾ ਰੱਖੇ گاਉ ਉਹ گاਉ ਨੂੰ ਬਦਬੂ ਤੋਂ ਬਚਾਦੇ ਰੱਖਦਾ ਹੈ ਹਿਰਦਿਆਂ ਨੂੰ ਬਦਬੂ ਤੋਂ ਬਚਾਦੇ ਰੱਖਦੇ ਨੇ ਹਿਰਦਿਆਂ ਦੇ ਬਦਬੂ ਰ ਪੈਦਾ ਹੋਣਾ ਭੁੱਖ ਚੋਂ ਕਿਸੇ ਦੇ ਦੁਰਗੱਧ ਨਾ ਆਵੇ ਤੋ ਵੀ ਤਾਂ ਸੁੱਖਰੇ ਨੇ ਹਉਤੀ ਨੇ ਗੱਲ ਆਪਣੀ ਉਹ ਕਰਦਾ ਹੈ ਕਬੀਰ ਹਾਂਜੀ 7 ਸਾਧੂ ਸਭ ਕਹੇ ਸੱਤ ਵਜਨ ਸਾਧੂ ਸਭ ਕਹਤ ਅਸਲ ਜੇਕ ਸੂਰ ਜਿਹੜਾ ਲੱਗਦਾ ਮੁਸਲਮਾਨਾਂ ਵਾਸਤੇ ਬਹੁਤ ਭੜਿਆ ਜੀਹੂਰ ਕਰਦੇ ਨੇ ਸੱਤ ਜੀਰੂ ਸੱਤ ਤੋਂ ਜ਼ਿਆਦਾ ਭੜਾ ਦੀ ਕਰਾ ਹੋਵੇ ਮੁਸਲਮਾਨ ਨੂੰ ਸੂਰ ਕਰਦੇ ਸੂਰ ਸਾਡੇ ਹਿੰਦੂਆਂ ਚ ਕੁੱਤਾ ਕੋਹਦੇ ਨੇ कुत्ता भी गंद लिखा जाता है सुअर भी खा जाता है समझ वो कुत्ता भी कहता है जोर कहता है सुअर लोड़ भर काटता है वो सब बात एक किस्म का बुरा तो बुरा शब्द है आज भी बात है सुअर क्या नाम है सुअर का बच्चा भी ऐसे चले वो मुसलमान टीचर होते थे वो कहते थे उधर मन में आया है ਉਹ ਮੁਸਲਮਾਨਾਂ ਨੇ ਜ਼ੋਰ ਕਹਿ ਉਹਨੂੰ ਸੂਰ ਇਹ ਉਹਨਾਂ ਨੇ ਕਿਹਾ ਤਾ ਵੀ ਉਹਨਾਂ ਨੇ ਕਿਹਾ ਜਾਜਮਿਆ ਹੋਇਆ ਸੂਰ ਕਬੀਰ ਨੂੰ ਜੇ ਕੁੱਤਾ ਕਹੇ ਤਾਂ ਕੁੱਤੇ ਦਾ ਜਵਾਬ ਦੇਦਾ ਕਬੀਰ ਕੋ ਕਰਾਮ ਕਹੋ ਮਤੀਆ ਜਦ ਕੁੱਤਾ ਕਹੇ ਕੁੱਤੇ ਦਾ ਜਵਾਬ ਦਿੰਦਾ ਜਾਂ ਸੂਰ ਕਹੇ ਤਾਂ ਸੂਰ ਦਾ ਜਵਾਬ ਦਿੰਦਾ ਜਿਵੇਂ ਉਹ ਆਪਣਾ ਹੀ ਦਿੱਤਾ ਹੋਇਆ ਕੱਲ ਚ ਭੇਦ ਇਹੀ ਆ ਬਸ ਉਹ ਜਣ ਵਾਲੀ ਗੱਲ ਇੱਥੇ ਹੁੰਦੀ ਹੈ ਸ਼ਬਦ ਭੇਦ ਹੈ ਸ਼ਬਦ ਭੇਦ ਤੇ ਬਿਨੋ ਗੱਲ ਬਣਦੀ ਨਹੀਂ ਸ਼ਬਦ ਭੇਜ ਜਾਣਾ ਹੈ ਜਾਣਾ ਹੀ ਸਹੀ ਪਰ ਸਾਥ ਨਾਲੋਂ ਫਿਰ ਵੀ ਚੰਗਾੁੱਦਾ ਆਛਾ ਰੱਖੇ ਗਾਉ ਮਚਾਣਾ ਤਾਂ ਤੀ ਫੱਲੇਣਾ ਹੈ ਘਰ ਘਰ ਦੇ ਵਿੱਚ ਹੋਜੀ जो जो ਹੋਏ सोई ਸੁਖ माने, ਕਰਨ ਕਰਾਵ ਪ੍ਰਭ ਪ੍ਰਭ ਜਾਣੇ ਜੋ ਜੋ ਹੋਏ ਸੋਈ ਸੁਖ ਮੰਨੇ ਉਹ ਜਿਹੜਾ ਜਿਸ ਕੀ ਰਹਿਤ ਹੈ ਜਿਹੜਾ ਸਭ ਘਟਾਂ ਦੇ ਵਿੱਚ ਸਾਰਿਆਂ ਦੇ ਵਿੱਚ है। ਪੇਖਣ ਸਭ ਬ੍ਰਹਮ ਹੀ ਦਾ ਇਹ ਜਿਹਦੀ ਰਹਿਤ ਹੈ ਉਹ ਫਿਰ ਕੀ ਕਰਦਾ ਜੋ ਹੁਕਮ ਵਰਤਦਾ ਕਰਨ ਹਾਰ ਪ੍ਰਭੂ ਦੀ ਉਹਨੂੰ ਜਾਣਕਾਰੀ ਹੈ ਕਰਨ ਹਾਰ ਪ੍ਰਭੂ ਜਾਣੇ ਹਾਂ ਕਰਨ ਹਾਰ ਪ੍ਰਭੂ ਦੀ ਉਹਨੂੰ ਜਾਣਕਾਰੀ ਹੁੰਦੀ ਹੈ ਉਹਨੂੰ ਹਕਮ ਦੀ ਹਾਕਮ ਦੀ ਜਾਣਕਾਰੀ ਹੈ ਸੱਚਖੰਦ ਦੀ ਜਾਣਕਾਰੀ ਹੈ ਪ੍ਰਭਾ ਆਪਣੇ ਕਾ ਜੋ ਹੋਏ ਸੋਈ ਸੁਖ ਮੰਨੇ ਕਰਨ ਰਾਵਣ ਹਾਰ ਪ੍ਰਭੂ ਜਾਣੇ ਕੋਈ ਜੋ ਜੋ ਹੋਏ ਜੋ ਹੋ ਰਿਹਾ ਉਹਦੇ ਚ ਸੁਖਦਾ ਇੱਕ ਬੰਦਾ ਨੂੰ ਮਿੱਠਾ ਕਰਕੇ ਬੰਦਾ ਕਰਨ हार प्रभु वो जानदा समझदा ओ को भी समझदा अंतर बसे बाहर भी ओही नानक दर्शन देख सब मोड़ी अंतर बसे बाहर भी ओही ओ अंदर भी और बाहर भी पूर्ण प्रभु कोद अंदर भी आके बसता बाहर जड़ा संसार के वर्सदा भी पूर्ण प्रभु दे रूप के वर्सदा प्रभु ने रूप के भी वर्सदा ਇੱਕੋ ਜਾਂਦਾ ਨਾ ਫਿਰ ਅੰਦਰ ਬਾਹਰ ਇੱਕੋ ਜਾਂਦਾ ਪਰ ਉਹੀ ਸਵਾ ਦਾ ਅੰਦਰ ਹੈ ਉਹੀ ਸਵਾ ਦਾ ਬਾਹਰ ਜੇ ਅੰਦਰ ਸਵਾ ਸੱਚਖੰਡ ਵਾਲਾ ਸੱਚਖੰਡ ਵਾਲਾ ਬਾਹਰ ਸਵਾ ਸੱਚਖੰਡ ਚੱਲਦਾ ਨਹੀਂ ਫਿਰ ਉਹਦਾ ਬਾਹਰ ਅੰਦਰ ਕੁਸਵਾ ਹੁੰਦਾ ਇੱਕੋ ਸਾਬ ਨੂੰ ਵਰਤਦਾ ਅੰਦਰ ਵਸਦਾ ਹੈ ਬਾਹਰ ਦਾ ਵਸਦਾ ਹੈ ਜਦ ਬਾਹਰ ਵਰਤਦਾ ਤਾਂ ਮੇ ਉਹ ਹੀ ਸਵਾਹਨ ਵਰਤਣਾ ਇਹ ਨਹੀਂ ਹੈ ਕੋਈ ਬਾਹਰ ਬਲਵਾਜ ਹੋਰ ਸਵਾਹਨ ਵਰਤਣ ਉਧਰ ਹੋਰ ਵਰਤਣ ਇੱਕੋ ਹੀ ਸਵਾਹਨ ਤੂ ਦੋ ਤੋਈ ਬਸ ਬੋਲ ਕੋਲ ਪ੍ਰਭ ਹੋ ਗਿਆ ਲੋ ਫਿਰ ਅੰਦਰ ਬਾਹਰ ਇੱਕੋ ਹੀ ਹੋ ਗਿਆ ਹਮ ਤਾਂ ਦੋ ਤਾਂ ਰਹੇ ਨਾ ਇਥੇ ਆ ਕੇ ਢਾਲ ਖਾਦੂ ਹੋਈਏ ਸਿਰਫ ਹੁਣ ਢਾਲ ਨਹੀਂ ਜਦ ਕਿ ਅੰਦਰ ਬਾਹਰ ਇੱਕ ਹੈ ਉਹ ਸਰੀਰ ਉੱਤਰ ਪਸ ਹੈ ਬਹਰ ਵੀ ਉਹੀ ਬਾਹ ਦੇ ਧਿਆਨ ਹੈ ਬਾਹ ਦਾ ਦਾ ਧਿਆਨ ਹੈ ਧਿਆਨ ਬਾਹ ਦਾ ਬਸ ਬਾਹ ਵੀ ਉਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਉਹ ਨਾਨਕ ਜਿਹੜਾ ਇਹ ਗੱਲ ਨੂੰ ਸਮਝ ਲਵੇ ਉਹਦੇ ਦਰਸ਼ਨ ਨੂੰ ਜਿਹੜਾ ਜੀਵ ਨੇ ਭਗਤਾਂ ਨੂੰ ਸਮਝ ਲਿਆ ਸੀ ਉਸ ਭਿੜੇ ਜਦੋਂ ਜੁਹਦੇ ਸੀ ਉਹਨਾਂ ਦਾ ਭਗਤਾਂ ਨੂੰ ਹੋਇਆ ਦੋ ਜੇ ਲੈ ਦਾ ਮੋਨਾੰਗਣਾ ਨ ਹੋਇ ਜੁੜਿਆ ਤਾਂ ਲੈਣਾ ਹੋਸੀ ਜਿਹੜਾ ਹੋਰੀ ਹੋਇਆ ਕੋਈ ਨਹੀਂ ਲੇ ਜੀ ਸ਼੍ਰੀ ਚੰਦਾ ਮੋਨਾੰਗਣਾ ਹੈ ਉਹਨੇ ਦਰਸ਼ਨ ਕੀਤਾ ਹੀ ਨਹੀਂ ਨਾ ਸਮਝੇ ਨਹੀਂ ਜਦੋਂ ਸਮਝੇ ਨਾ ਸਮਝੇ ਨਾ ਵਾਸ ਕਿਨੇ ਨਾਂ ਦੇ ਮੁੰਡੇ ਸਮਝਾਉਦਾ ਨਾਂ ਕਰਾਂ ਹੋ ਗਿਆ ਅਜ ਮੋ ਪਹਿਲਾ ਹੋ ਗਿਆ ਉਹ ਆਪਣਾ ਬਣਾ ਲਿਆ ਨਾ ਬੋਕੜਾ ਬਣ ਗਿਆ ਧਰਕੇ ਬਣ ਗਿਆ ਉਹਦਾ ਰੂਪ ਹੋ ਗਿਆ